जलोक कुटुंब यतन करणं माया अनेक उद्मह हर भक्ति भावहीनं नानक प्रभु विसरत ते प्रितह जदे दे माया माड़े नहीं हैगे पर हर नहीं होना चाहिदा ਹੱਥ ਪੈਰ ਸਾਬ ਚੇਤਨੁਨਨ ਨਾਲ ਰੱਖਣਾ ਚਾਹੀਦਾ ਉਹ ਯਤਨ ਕੱਲ ਨੇ ਮਾੜੇ ਨਹੀਂ ਹੈ ਤੇ ਤਿਆਗ ਦੇ ਨਾਲ ਭਗਤੀ ਇਹਨਾਂ ਹੋ ਜਾਂਦਾ ਮੈਂ ਕਹਿੰਦਾ ਉਹ ਭਗਤੀ ਤੋਂ ਇਹਨਾਂ ਹਰ ਭਗਤੀ ਭਾਵ ਹੀਨ ਭਾਵ ਤਾਂ ਬੰਦੀ ਹੈ ਪਾਠ ਅੰਤਰ ਵੀ ਹੈਗਾ ਵੀਡਾਂ ਦੇ ਵਿੱਚ ਹਰ ਭਗਤੀ ਵੀ ਭਾਵਨਾ ਤੋਂ ਜਿਹੜਾ ਉਹ ਪਾਠ ਅੰਤਰ ਦੇ ਵਿਚਾਲੇ ਆਉ ਹਰ ਭਗਤੀ ਭਾਵ ਹੀ ਨਾਲਕ ਪ੍ਰਭ ਵਿਚਰਤੇ ਪ੍ਰੇਤ ਹੈ ਜਿਹਨਾਂ ਨੂੰ ਪ੍ਰਭ ਵਿਚਰਿਆ ਹੋਇਆ ਪ੍ਰੇਤ ਨੇ ਅਸਲ ਜ ਪ੍ਰੇਤ ਭਾਵ ਨਹੀਂ ਕਹ ਲੋ ਜੈ ਤੋਂ ਹੀ ਕਹੋ ਆਉਣਾ ਵੈਸੇ ਗੱਲ ਘੱਟ ਬਣਦੀ ਹੈ ਭਾਵ ਜਿਆਦਾ ਵਧੀਆ ਬਣਦੀ ਹੈ ਗੱਲ ਨਹੀਂ ਪਰ ਬਿਨਾ ਭਾਵ ਤੋਂ ਜੇ ਭਗਤੀ ਕੀਤੀ ਉਹਦਾ ਕੀ ਫਾਇਦਾ ਹੋਊਗਾ ਭਗਤੀ ਤਾਂ ਸਾਰੇ ਕਰਦੇ ਆ ਪਰ ਭਾਵ ਦੇ ਨਾਲ ਕਰਨੀ ਚਾਹੀਦੀ ਹੈ ਨਹੀਂ ਉਹ ਭੈ ਤੇ ਭਗਤੀ ਦੀ ਗੱਲ ਹੈ ਉੱਥੇ ਭਾਵ ਦੀ ਨਹੀਂ ਗੱਲ ਆਵਾਜ਼ਾਂ ਜਿਹੜੇ ਭక్తి ਭਾਵ ਵਾਲੀ ਹੁੰਦੀਆਂ ਨਾ ਉਹਨੂੰ ਅਸੀਂ ਸਰਧਾ ਵਾਲੀ ਭక్తి ਕਹਿੰਦੇ ਹਾਂ। ਅੱਛਾ ਜੀ। ਚਲੋ ਕੁਝ ਵੀ ਹੈ। ਓਏ ਨਾਨਕ ਪ੍ਰਭ ਵਿਸਰਤ ਤੇ ਪ੍ਰੇਤ। ਕੇ ਇਹ ਕੰਮ ਕਰਦੇ ਆਪਣੇ ਪੰਲ ਕਿੱਦ ਮਾਇਆ ਦੇ ਫਿਰ ਭਾਵ ਜੀ ਨੇ। ਠੀਕ ਹੈ ਪਰ ਉਹ ਪ੍ਰੇਤ ਹੈ ਨਾ ਫਿਰ ਭਗਤੀ। ਵਾਹ ਪ੍ਰੇਤ ਨੇ ਭਗਤ ਉਹ ਮਾਇਆ ਮੋਹ ਪ੍ਰੇਤ ਹੈ ਉਹਨਾਂ ਦੇ ਤਾਂ ਗੰਜ ਕਰਨਾ ਨਹੀਂ ਰਹਿੰਦਾ ਠੀਕ ਹੈ ਉਹ ਪ੍ਰੇਤ ਦੀ ਜੋਨੀ ਨੇ ਹੋ ਮਾਇਆ ਦੇ ਵਿੱਚ ਫਸੇ ਸਾਰੇ ਪ੍ਰੇਤ ਹੀ ਨੇ ਠੀਕ ਹੈ ਜੀ ਅੰਤ ਕਾਲ ਜੋ ਮੰਦਰ ਸਿਮਰੇ ਹੈ ਉਸ ਤਰ੍ਹਾਂ ਦੀ ਆਗਿਆ ਹਾਂਜੀ ਹਾਂਜੀ ਠੀਕ ਹੈ ਜੀ ਟੁੱਟੜੀਆਂ ਸਪ੍ਰੀਤ ਜੋ ਲਈ ਬਿਆਨ ਸਿਓ ਨਾਮਕ ਸੱਚੀ ਰੀਤ ਸਾਈਂ ਸੇਤੀ ਰਹਤੇ ਆ ਜਿਹੜੇ ਪ੍ਰੀਤ ਸਾਈਂ ਨੂੰ ਛੱਡ ਕੇ ਹੋਰ ਨਾਲ ਬਿਆਨ ਹੁੰਦਾ ਹੋਰ ਕਿਸੇ ਚੀਜ਼ ਨਾਲ ਪ੍ਰੀਤ ਲਾਈ ਹੋਈ ਹੈ ਤਾਂ ਨੂੰ ਪ੍ਰੀਤ ਹੈ ਮਾਇਆ ਨਾਲ ਪ੍ਰੀਤ ਉਹ ਟੁੱਟਣ ਵਾਲੀ ਪ੍ਰੀਤ ਹੁੰਦੀ ਹੈ ਤਾਂ ਉਹਨੂੰ ਪ੍ਰੀਤ ਕਹਿੰਦਾ ਝੂਠੀ ਪ੍ਰੀਤ ਹੈ ਝੂਠੀ ਕਿਉਂਕਿ ਪ੍ਰੀਤ ਜਗਤ ਮੈਂ ਮਾਇਆ ਦੀ ਉਹ ਜਗਤ ਦੀ ਪ੍ਰੀਤ ਝੂਠੀ ਹੈ ਟੁੱਟ ਜਾਣੀ ਹੈ ਮਾਇਆ ਦੀ ਪ੍ਰੀਤ ਝੂਠੀ ਹੈ ਟੁੱਟ ਜਾਣੀ ਆਲ ਕੇ ਭਕਤੀ ਰੀਤ ਸਾਈਂ ਸੇਤੀ ਰਹਤੇ ਆ ਉਹ ਜਿਹੜੀ ਪ੍ਰੀਤ ਦੀ ਰੀਤ ਇਹੀ ਰੀਤ ਹੈ ਪ੍ਰੀਤ ਦੀ ਰੀਤ ਇਹੀ ਹੈ ਚੇਤਨ ਨਾਲ ਜੁੜਨਾ ਹੈ ਮਾਇਆ ਜਿਹੜੀ ਜੜ ਹੈ ਚੇਤਨ ਚੇਤਨ ਨਾਲ ਹੀ ਜੁੜਿਆ ਰਹਿ ਸਕਦਾ ਠੀਕ ਹੈ ਜੀ ਪੌੜੀ ਜਿਸ ਬਿਸਰਤ ਤਨ ਭਸਮ ਹੋਏ कहते सब प्रेत छिन्न ग्रह में बसन नाल तान जेले पास हो है ने हंस ने गलने असल हंस अकेला अंदर लेन गलला मुड़ लेन गलला जाके पहला हां तान पास होए तान हो जांदा सब प्रेत पितरे ते ਕਿਹਨ ਕਰਾ ਮ ਬਸਣ ਨ ਦੇਵੀ ਇੱਕ ਖਰਬੇ ਬਸਣ ਨਹੀਂ ਕੋਈ ਦਿੰਦਾ ਇਹਨੂੰ ਕਿਤੇ ਹਿਰਦੇ ਚ ਹਿਰਦੇ ਚ ਖਿਲਬਰੀ ਕਈ ਵਾਰ ਰੱਖ ਲੈਂਦੇ ਨੇ ਕਿੰਨਾ ਦਿਨਾਂ ਚਿਰ ਵੀ ਜਿੰਜੋ ਲਗਾਏ ਕਹਿੰਦੇ ਘਰ ਆਲੇ ਵੀ ਕਾਢੋ ਕਾਢੋ ਕਹਿ ਦਿੰਦੇ ਨੇ ਸਰੀਰ ਕਰਕੇ ਘਰ ਆਲੇ ਕਾਢੋ ਕਾਢੋ ਕਹਿ ਦਿੰਦੇ ਨੇ ਆਤਮਾ ਰਹਿ ਨਹੀਂ ਸਕਦੀ ਭੂਗਣਾ ਆਤਮਾ ਕਿਵੇਂ ਰਹੇਗੀ ਵਿੱਚ ਕਰ ਅਨਰਥ ਦਰਬ ਸੰਚਿਆ ਸੋ ਕਾਰਜ ਕੇਤ ਜੈਸਾ ਬੀਜੇ ਸੋ ਲੁਣਾ ਕਰਮ ਇਹ ਖੇਤ ਕਰ ਅਨਰਥ ਕਰ ਕੇ ਜਿਹੜਾ ਜ਼ੁਲਮ ਕਰਕੇ ਧੰਨ ਇਕੱਠਾ ਕੀਤਾ ਸੀ ਉਹ ਦਾ ਸਿੱਟਾ ਆਇਆ ਬਈ ਤੇਰੇ ਉਹ ਜ਼ੁਲਮ ਦੀ ਪੰਡ ਫਿਰ ਤੇ ਚੁੱਕ ਕੇ ਨਾਲ ਲੈ ਗਿਆ ਧਾਨੇ ਤੇ ਰਹਿ ਗਿਆ ਜੈਸਾ ਬੀਜੇ ਸੋ ਲੁਣਾ ਕਰਮ ਇਹ ਖੇਤ ਇਹ ਜਿਹੜਾ ਇਹੀ ਤੇਰਾ ਕਰਮ ਕੀਤਾ ਹੈ ਉਹੀ ਤੇਰਾ ਹਲ ਤੇ ਉਹੀ ਖੇਤ ਬਣ ਗਿਆ ਤੇਰਾ ਫਿਰ ਜਨਮ ਦਾ ਕਾਰਨ ਉਹ ਇੱਥੇ ਝਗੜੇ 'ਚ ਫਸਿਆ ਰਹਿ ਗਿਆ ਤੂੰ ਝੜਿਆਂ ਦੇ ਵਿੱਚ ਪਹਿਲਾ ਨੰਨ ਕੀ ਵੈਰ ਵਿਰੋਧ ਕਾਮ ਕਲਾਸ ਰੱਖਦੇ ਆਪ 'ਚ ਫਸੇ ਜਿਹੜੇ ਨੇ ਅਨਾਰਥ ਕਾਰਨ ਝਗੜੇ ਕਾਰਨ ਧੰਨ ਕਟਾ ਕਰਨਾ ਮਰ ਜਾਣਾ ਇੱਥੇ ਛੱਡ ਜਾਣਾ ਫਿਰ ਜਨਮ ਲੈ ਲੈਣਾ ਇਹ ਤਾਂ ਝਗੜਾ ਹੀ ਹੈ ਖੇਤ ਬਣੇ ਰਹਿਣਾ ਤੇਰੇ ਖਾਇ ਖੇਤ ਜੇ ਮੈਦਾਨੇ ਜੰਗ ਨੂੰ ਕਹਦੇ ਉਹਦੇ ਖੇਤ ਹੀ ਚਾਰ ਗਾਇ ਹੈ ਜੀ ਤੇ ਅੱਗੇ ਵਾਸਤੇ ਤਾਂ ਹਰ ਵਿਸਰਿਆ ਜੋਨੀ ਪਰਮੇਤ ਠਕਰਤ ਕਾਣ ਜਿਹੜੇ ਜਿਹੜੇ ਪਰਮੇਸ਼ਰ ਦਾ ਇੰਨਾ ਕੁਝ ਦਿੱਤਾ ਹੋਇਆ ਉਹਨੂੰ ਭੁੱਲ ਜਾਂਦੇ ਨੇ ਉਹਨੂੰ ਵਿਸਰ ਜਾਂਦੇ ਨੇ ਉਹ ਉਹਨਾਂ ਦੇ ਵਿਰੋਧ ਕਰਦੇ ਨੇ ਉਹ ਕਿਰਤ ਕਰਨ ਨੇ ਜੰਮਦੇ ਗੱਲ ਸੀ ਪ੍ਰਾਣੀ ਜੋ ਜਿਸ ਦੇ ਨੌ ਪੱਲੇ ਉਸ ਤਰ੍ਹਾਂ ਦੀ ਗੱਲ ਨਹੀਂ ਕਰ ਸਕਿਆ ਪਰਮੇਤ ਪਰ ਲੋਕਾਂ ਨੂੰ ਦੇਖ ਕੇ ਦੇਖਾ ਦੇਖ ਕਿਰਤ ਕਰਨ ਹਰ ਵਿਸਰਿਆ ਜੋਨੀ ਪਰਮੇਤ ਤੇ ਦੁਬਾਰਾ ਜਨਮ ਵਿੱਚ ਦੁਬਾਰਾ ਆਏਗਾ ਜੀ ਠੀਕ ਹੈ ਜੀ ਇੱਥੇ ਚੌਥੀ ਪੌੜੀ ਸਮਾਪਤੀ ਹੈ ਜੀ